ਖਖਾ ਇਹ ਕੋੜਮਰ ਆਵਾਜ਼ ਇੱਕ ਗੱਲ ਜਰੂਰ ਹੈ ਜਿਹੜੀ ਮੈਂ ਦੱਸ ਸਕਦਾ ਮਨ ਦੀ ਹਾਲਤ ਕੀ ਹੋ ਜਾਂਦੀ ਹੈ ਇਹ ਦੱਸੀ ਜਾ ਸਕਦੀ ਉਹ ਰਾਸ ਆਉਣ ਨਾਲ ਮਨ ਤੇ ਪ੍ਰਭਾਵ ਕੀ ਪੈਂਦਾ ਮਨ 'ਚ ਬਦਲਾਅ ਕੀ ਆਉਂਦਾ ਇਹ ਦੱਸਿਆ ਜਾ ਸਕਦਾ ਖਖਾ ਕਿਹਾ ਜਾਂਦਾ ਇਹ ਵੀ ਦੱਸਿਆ ਜਾ ਸਕਦਾ ਮਨ ਬਦਲ ਬਦਲਾਅ ਕਿਹਾ ਜਾਂਦਾ ਇਹ ਦੱਸਿਆ ਜਾ ਸਕਦਾ ਬਾਨ ਉਦਰੇ ਟਿਕ ਜਾਂਦਾ ਹੈ ਹਿਰਦੇ ਵਿੱਚ ਟਿਕ ਜਾਂਦਾ ਹੈ ਖੋੜਮਨ ਆਵਾ ਇਹ ਖੋੜਮਨ ਆਕਾ ਆਇਆ ਖੋੜ ਬਨ ਆਵਾ ਐਸਾ ਚੱਲਦਾ ਹੈ ਲਾਈਨ ਦੇ ਉੱਤੇ ਖੋੜ ਕਹਿੰਦੇ ਸੀ ਅੱਗੇ ਇੱਕ ਗੱਡੇ ਚੱਲਦੇ ਹੁੰਦੇ ਸੀ ਆਪਣੇ ਕੱਚੇ ਰਸਤੇ ਤੇ ਉਹ ਜਿਹੜੀ ਧੀ ਬਹਿ ਜਾਂਦੀ ਸੀ ਉਹਨੂੰ ਖੋੜ ਕਹਿੰਦੇ ਸੀ ਜੇ ਪਹੀਆ ਲੀਦੇ ਵਿੱਚ ਰਹੇ ਗੁਰਦਦਾ ਜ਼ੋਰ ਘਟ ਲੈਂਦਾ ਹੁੰਦਾ ਇਹ ਡੇਡਾ ਜਦ ਨਹੀਂ ਪੰਦੇ ਜ਼ੋਰ ਜ਼ਿਆਦਾ ਲੱਗਦਾ ਧਾਰੇ ਉਹ ਪਹੀਏ ਨੂੰ ਨੁਕਸਾਨ ਦਰੇ ਬਹੁਤ ਨੁਕਸਾਨ ਹੋ ਗਏ ਜੇ ਤਾਂ ਚੱਲੇ ਰਾਮ ਦੇ ਨਾਲ ਹੁਕਮ ਦੇ ਵਿੱਚ ਫਿਰਦਾ ਚੱਲਦਾ ਰਵਾਇ ਦੀ ਗੱਡੀ ਜ਼ਿੰਦਗੀ ਦੀ ਜਦੋਂ ਅਸੀਂ ਸਾਈਡਾਂ ਨੂੰ ਖਿੱਚਦੇ ਖੋਹਦੇ ਉਦੋਂ ਹੀ ਤਕਲੀਫਾਂ ਘੜੀਆਂ ਹੁੰਦੀਆਂ ਨੇ ਸਰ ਉਦੋਂ ਹੀ ਵੇਬ ਰੇ ਤੇ ਜ਼ੋਰ ਪੈਂਦਾ ਹੈ ਉਦੋਂ ਹੀ ਵੇਬ ਦੀਆਂ ਫੜਦੀਆਂ ਨੇ ਜਾਦੀ ਜਿਆਦਾ ਸੋਚ ਕੇ ਚੱਲਦੇ ਹੋ ਜਿਆਦਾ ਕੰਬਰ ਨੂੰ ਠੀਕ ਕਰਕੇ ਚੱਲਦੇ ਹੋ। ਤੇਰਾ ਰਾਮ ਤੇਰੀ ਭਰੋਸਾ ਕਰਦੇ ਮੈਂ ਰਾਮ ਦਾ ਗੜਬੜ ਕਰੂਗਾ ਆਪਾਂ ਆਪਣੀ ਅਕਲ ਨਾਲ ਕੰਮ ਕਰੋ। ਰਾਮ ਦਾ ਕੀ ਪਤਾ ਪਰ ਵੱਲ ਰੋਟੀ ਮਿਲਿਆ ਲਵੜੇ। ਰਾਮ ਨੂੰ ਜਿਆਦਾ ਮੂਰੇ ਨਿਕਲਦੀ ਗੱਲ ਕਰਦੇ। ਜਿਹੜੇ ਨਾਲ ਗੱਡੀ ਰਾਮ ਲੈ ਰਹੇ ਹਨ ਨਾ ਹੋਰ ਬਣਾਉਣ ਦੀ ਗੱਲ ਕਰਦੇ ਸ਼ਾਰਟਕਟ ਆਰ ਵਧੀਆ। ਵਧੀਆ ਦੀ بجائے ਘਟੀਆ ਗੱਲ ਕਰਦੇ। ਆਹੀ ਗੱਲ ਇਦਾਂ ਹੀ ਕਰਦਾ ਹੋਵੇ ਇਦਾਂ ਹੀ ਕਰਦਾ ਤਕਲੀਫਾਂ ਘੜੀਆਂ ਕਰੀਏ ਗੱਲ ਲੰਦਾ ਆਪਣੇ ਵਾਸਤੇ ਖਖਾ ਜ਼ੋਰ ਜਿਆਦਾ ਲੱਗਦਾ ਹੈ ਬਾਟ ਘੱਟ ਰਬੜਦੀ ਹੈ ਖਖਾ ਖੋੜਿਆ ਹੈ ਮਨਾਵਾ ਜੇ ਪਰ ਆਪ ਦੇ ਨਾਲ ਰਸ ਲੈ ਲੰਦਾ ਫਿਰ ਬਿਲਕੁਲ ਲੀਚ ਰਹਦਾ ਹੈ ਫਿਰ ਇਹਦੀ ਬੰਦਾ ਜਦੋਂ ਲੀਂਹ ਤੇ ਜਦੋਂ ਟੁੱਟੀ ਜਾਂਦੀ ਹੈ ਲੀ ਤਾਂ ਉਤਰ ਗਈ ਘੁੱਤੀ ਘਟ ਜਾਂਦੀ ਹੈ फेर ਗੱਡੀ ਇਹਦੀ ਲੀਤੇ ਰਹਿੰਦੀ ਐ ਸੀ ਲੀਤੇ ਬੰਦੀ ਆਪੇ ਹੀ ਚਲੀ ਜਾਂਦੀ ਐ ਖੋੜੇ ਛਾੜ ਲੰਦਾ ਦਿਸਤਾਵਾ ਬਸ ਉਹ ਲੀ ਛੱਡਦਾ ਹੀ ਨਹੀਂ ਬਦਲ ਤੇ ਪਹੁੰਚਦਾ ਜੇ ਗੱਡੀ ਲੀ ਛੱਡ ਜਿਵੇਂ ਪਹੁੰਚਦੇ ਮੰਜ਼ਿਲ ਤੇ ਦੱਬਾ ਇੱਕ ਵਾਰ ਲਾਈਨ ਚਲਾ ਕੇ ਖੇਤਾ ਜੋਤ ਕੇ ਕਹਿੰਦਾ ਜੀ ਰਹੁਦਾਰੀ ਜ਼ਿੰਦਗੀ ਫਿਰ ਜਿੱਦੇ ਜਰੂਰ ਕੋ ਲੀਤੇ ਲਿਆ ਕੇ ਫੇਰ ਤੋਂ ਉਲਵੇ ਜਦੋਂ ਜਿੱਤੇ ਪਹੁੰਚਦੀ ਐ ਜੇ ਲੀਤੇ ਰਹੇ ਜੇ ਤੋ ਵਿਛੜਿਆ ਉੱਥੇ ਪਹੁੰਚ ਜੇ ਖੋੜੇ ਛਾੜਨ ਦਾ ਇਹਦਾ ਤਾਵਾ ਆਪਣੀ ਇਹੋ ਲਾਈਨ ਛੱਡ ਕੇ ਅੰਦਰ ਵਾਲੇ ਨੂੰ ਦੇਖ। ਕੋਈ ਸ਼ਾਰਟਕਟ ਰਸਤਾ ਕਿਹੜਾ ਛੇਤੀ ਪਹੁੰਚ ਇਹ ਆ ਫਿਰ ਆ ਚਲੋ ਪਹੁੰਚਤਾ ਜਾਣਾ ਹੀ ਨਾ ਅੰਦਰ ਵਾਲੇ ਨੇ ਵੀ ਦੇਖ ਲੀਏ। ਬਾਗ ਲੱਗੇ ਹੋਏ ਜੇ ਬਾਹਰ ਦੇ ਵਾਇਆ ਦੇ ਪਦਾਰਥ ਸੰਭਲ ਨਹੀਂ ਸਕਦਾ। ਦਾਇਦਰ ਦਾ ਵਾਇਆ ਵੱਲ ਜਾਈ ਚੱਲ। ਬਾਇ ਜੇ ਸੋਖਾ ਤੋਂ ਸੋਖੀ ਬੰਦ ਦੋ ਬਾਇ ਜੇ ਕੋਈ ਰਾਜ਼ ਨਹੀਂ ਰਹਦਾ ਬਸ ਅਈ ਖਸਮੇ ਜਾਨ ਖਿਮਾ ਕਰ ਰਹਿ ਖਤਬੇ ਜਾਨ ਖਤਬੂ ਜਾਣ ਲੈਂਦਾ ਹੁਕਮ ਜਾਣ ਲੈਂਦਾ ਵੀ ਇਹ ਜਿਹੜਾ ਲਾਈਨ ਤੇ ਚੱਲਣਾ ਜਿਵੇਂ ਪਰਵੇਸ਼ਰ ਦੇ ਆਪਣੀ ਚਲਾਈ ਹੋਈ ਰੂਟੀਨ ਦੇ ਕੋ ਬੜਾ ਸੌਖਾ ਚੱਲਦਾ ਚੱਲਦਾ ਕਦੇ ਤੱਕ ਲਈ ਹੋਈ ਏ ਆਪਾਂ ਕੋਈ ਵੀ ਚੀਜ਼ ਚਲਾ ਲਈ ਉਹਦੀ ਸਪੀਡ ਘਟ ਜਾਂਦੀ ਹੈ ਕਦੇ ਵਜ੍ਹਾ ਹੁੰਦੀ ਹੈ ਕਿ ਕੌਸਪੀਡ ਤੇ ਚੱਲਦਾ ਕਿਉਂ ਚੱਲਦਾ ਸਪੀਡ ਪਾੜੇ ਚੱਲਦਾ ਹੁਕਮ ਦੇ ਵਿੱਚ ਚੱਲਦਾ ਬੜਾ ਜ਼ੋਖੇ ਕਲੀਅਰ ਦ ਛੱਤੀ ਕੁ ਬਧੀਏ ਹੁਕਮ ਦੇ ਵਿੱਚ ਕੁ ਬਧੀਏ ਬੜੀ ਜ਼ੋਖੇ ਕੁ ਬਧੀਏ ਇਹਦਾ ਕੋਈ ਇਹਦਾ ਭਾਵ ਚੱਲਣ ਲੱਗੀ ਹੁਕਮ ਦੇ ਵਿੱਚ ਚੱਲੇ ਇਹ ਛੱਤੀ ਕੁ ਦੀ ਫ੍ਰੀਲੀ ਹੁਕਮ ਚੱਲਦੀ ਹੈ ਕਦੇ ਕੋਈ ਗੜੀ ਦਾ ਦਦੜੀ ਟੁੱਟਿਆ एवरीबडा को ग्रारी है भी कदी है किते को फोर नी दी नी। कोई, कोई को फोर्स सप्लाई हुंदी दी दीदी आ तो कोई की चलावरे कोई कदे पटा नहीं टूटया किते पटा ही दी किते कोई फोर्स सप्लाई हुंदी दी दीदी जारे पासे टूट तो आप देख ले को कितनी की वे जल्दी है ओदे पाढे जल्दी है जेवे चलावदा होवे जे ऐ चल ਜਦੋਂ ਕੁਦਰਤ ਚੱਲਦੀ ਹੈ ਫਿਰ ਇਹਦਾ ਕੋਈ ਜੋਰ ਨਹੀਂ ਲੱਗਦਾ। ਬ੍ਰਦੁਲ ਵੀ ਚੱਲਦੀ। ਪਾਣੀ ਵਿੱਚ ਦੂਰ ਜੋ ਪਾਣੀ ਵਿੱਚ ਚੱਦ ਪਾਣੀ ਚੱਲਦਾ ਹੈ ਦਰਿਆ ਦਾ ਕੋਈ ਜੋਰ ਲਾਉਂਦਾ ਹੋ। ਚੱਲਦਾ ਜਾ। ਉਹ ਕੁਦਰਤ ਬਹੁਤ ਜੰਦਾ। ਕੋ ਪਾਣੀ ਦਾ ਜੋਰ ਲੱਗਦਾ ਚੱਲਦਾ। ਤੁਹਾਨੂੰ ਵੀ ਲੈ ਜਾਂਦਾ ਰੋਣ। ਜਿੱਦਨੂ ਉਹ ਰਾਹ ਦਿੰਦਾ ਉਦੋਂ ਵੀ ਜਾਂਦਾ ਜਿੱਦਨੂ ਉਹਰੇ ਉਹ ਉੱਚਾ ਕੀਤਾ ਹੈ ਨਾ ਪਹਾੜ ਉਦੋਂ ਵੀ ਛੱਡ ਜਾਂਦਾ ਜਾਂਦਾ ਜਿੱਦਨੂ ਪਰਮੇਸ਼ਰ ਨੇ ਰਾਹ ਦਿੱਤਾ ਕਿ ਐ ਨੂੰ ਜਾਣਾ ਭਾਈ ਤਾਂ ਦੀਵਾ ਤੋਂ ਦਿੱਤਾ ਉਹ ਉਦੋਂ ਵੀ ਜਾਂਦਾ ਜਾਂਦਾ ਹੀ ਨਹੀਂ ਉੱਚੇ ਤੋਂ ਰੋਕ ਨਹੀਂ ਕਰਦਾ ਅਸੀਂ ਉੱਚੇ ਤੋਂ ਦਾ ਕਰਦੇ ਆ ਜਿਆਦਾ ਮਾਇਆ ਦੀ ਜਿਹੜੀ ਦੌੜ ਹੈ ਉੱਚੇ ਤੋਂ ਵੀ ਜਾਂਦਾ ਜਰ ਜੇ ਉੱਚਾ ਤੋਂ ਜਾਣਾ ਲੋ ਲੈਣਾ ਉਸਾਈ ਨਾ ਰਿਆ ਉਹ ਤੋ ਚੜ ਚੜਨ ਨਹੀਂ ਚੜਨ ਤਰੀ ਨਹੀਂ ਕਾਗੇ ਮੈਂ ਕਿਹਨਾਂ ਵਾਰ ਉਹ ਸਮੱਸਿਆ ਪੈਦਾ ਹੁੰਦੀ ਹੈ ਸਮੱਸਿਆ ਤਾਂ ਪੈਦਾ ਹੁੰਦੀ ਹੈ ਲੈਚਨ ਸਾਲ ਪੈਦਾ ਹੁੰਦੀ ਹੈ ਅੱਛਾ ਫਿਰ ਚੱਲ ਉੱਚਾ ਹੋਣਾ ਚਾਹੁੰਦਾ ਸਭ ਲੋ ਨੀਵਾੜੀ ਹੋਣਾ ਚਾਹਦਾ ਦੀਵਸਾ ਘੋਰਾ ਹੋਏ ਜੇ ਡਿਵਾ ਹੀ ਰਹੇ ਸੌਖਾ ਨਾ ਰਹੇ ਉੱਚਾ ਹੋਣਾ ਚਾਹਦਾ ਉੱਚਾ ਹੁੰਦਾ ਹੁੰਦਾ ਰੱਬ ਤੋਂ ਵੀ ਉੱਚਾ ਹੋਣਾ ਚਾਹਦਾ ਆਪੇ ਰੱਬ ਬਣਨਾ ਚਾਹਦਾ ਸਾਰੇ ਵੇਰੇ ਕਹਿੰਦੇ ਜਨਨ ਮੇਰੀ ਹਕੂਮਤ ਹੋਵੇ ਇਹ ਚਾਹੁੰਦਾ ਸੁਭਾਜੋ ਉਲਟਾ ਹੋ ਗਿਆ ਉੱਚਾ ਬਣਦਾ ਜਿਹੜਾ ਖਿਆਲ ਹੈ ਉਲਟੇ ਪਾਸੇ ਨੂੰ ਲੈ ਕੇ ਜਾਂਦਾ ਹੈ ਉੱਚਾ ਬੜਦਾ ਬੜਦਾ ਬੜਦਾ ਬੜਦਾ ਬੜਦਾ ਬੜਦਾ ਅਧੀਰ ਇਖਾ ਜ਼ਰੂਰੀ ਦੱਸ ਹੈ ਕਿ ਰੱਬ ਬਣ ਕੇ ਆਪ ਕਹੇ ਤਰ ਅਬੂ ਹੁਦੈਲੀ ਬੈ ਲੋ ਰੱਬ ਆਖਿਂ ਕਿਤੇ ਤੇ ਜਾ ਗਏ ਆ ਮੇਰਾ ਬੁੱਢ ਟਕਰਾਉ ਜੇ ਦੁਨੀਆ ਖਤਮ ਹੋ ਜੂ ਦੁਨੀਆ ਜਿਹਦੇ ਮੁਕਾਬਲੇ ਦਾ ਕੋਈ ਨਹੀਂ ਉਹ ਰੱਬ ਕਹੇ ਤੂ ਆ ਜਾ ਹੁਣ ਤੂ ਵੀ ਆ ਜਾ ਉਹਦੇ ਅੱਗੇ ਨਾਸ ਹੋਇਆ ਉਹਦਾ ਨਾਸ ਸਾਰਾ ਹੈ ਅਜੱਸੇ ਸਾਡੋ ਉਹ ਗੱਲਾਂ ਇਹ ਜੀ ਸਮਝਾਉਂਦੀਆਂ ਨੇ ਵੀ ਉੱਚਾ ਦੀ ਹੋਂ। ਉਹ ਗੱਲਾਂ ਸਰ ਮੱਥੇ ਤੇ ਨੇ ਸੁਣੀਆਂ ਸਭ ਨੇ ਉੱਚਾ ਫੇਰ ਹੋਣ ਦੀ ਅਸੀਂ ਛੱਡਦੇ ਜਦੋਂ ਸੱਤੇ ਹੋ। ਰੇ ਫੇਰ ਹੋਈ। ਉਹਦੇ ਪਿੱਛੇ ਕੀ ਗੱਲ ਸੀ ਸਮਝਾਉਂਦੀ। ਇਹ ਜਿਹੜਾ ਸੁਹਾਏ ਉੱਡੇ ਪਾਸੇ ਜਾ ਰਿਹਾ ਉੱਚਾ ਹੋਣ ਦਾ। ਉੱਚਾ ਜੇ ਉਹ ਕਰਦਾ ਤਾਂ ਜੇ ਉੱਚਾ ਕਰਦਾ ਉੱਚੇ ਹੋ ਜਾ ਦਿਮਗ ਕਰਦਾ ਦਿਮਗ। ਉੱਚਾ ਜਾ ਕੇ ਕਰਕੇ ਸਰਵਾਰਦੀ ਚੋਟੀ ਦੇ ਸਰਦਰ ਜਾ ਤੋ ਪਾਣੀ ਨੂੰ ਸਰਦਕ ਨਹੀਂ ਲਿਆ ਕੇ ਕੋਲੋਂ ਸਰਦਾ ਫਿਰ ਉਹ ਉਹ ਹੀ ਸਰਦਾ ਬਰਫ ਬਣਾ ਕੇ ਬਦਰਾਜ ਪਾ ਕੇ ਕੰਢੀ ਨੂੰ ਲੈ ਜਾਂਦਾ ਸੁਬਤ ਸੁਬਤ ਸੱਤੋ ਨੀ ਬੈਠੋ ਪਾਣੀ ਝਾੜਦਾ ਸੱਤੋ ਉੱਚਾ ਜਦੋਂ ਝਾੜਦਾ ਜੇ ਇਦਾਂ ਕਰਦਾ ਕਰੀ ਜਾਵੇ ਉਹਦੇ ਹੁਕਮ ਚ ਰਹੋ ਚਾਹੇ دیਵਾ ਕਰਦਾ ਜਾਂ ਉੱਚਾ ਸਰਦਾ ਬਾਜੇ ਦੀਵਤਾਂ ਕੋਈ ਜਿੱਤਦਾ ਨਹੀਂ ਜੇ ਬਰ ਉੱਚਾ ਤਾਂ ਕੋਈ ਜਿੱਤਦਾ ਨਹੀਂ ਉਹਦਾ ਕੀਤਾ ਉਹ ਉੱਚਾ ਹੋਦਾ ਕੀਤਾ ਜੀ ਉੱਚਾ ਕਿਉਂ ਕੀਤਾ ਇਹ ਗੁੱਪ ਤਾਂ ਨਹੀਂ ਕੋਈ ਕੁਛ ਕੱਬ ਲੈਣੇ ਉੱਤੋਂ ਜੇ ਪਾਣੀ ਉੱਚਾ ਜਾਂਦਾ ਨਾ ਰਸਤਾ ਬਣਦੀਆਂ ਜੇ ਪਾਣੀ ਉੱਚਾ ਜਾਂਦਾ ਉੱਚੇ ਤੋਂ ਲੈ ਨੂੰ ਤਾਂ ਮਿਲਦਾ ਅਸਲ ਚੋਦੇ ਇਹਨੂੰ ਉੱਚਾ ਨਿਚਾੜਿਆ ਉਹ ਜਿਹੜੇ ਬੈਠੇ ਨੇ ਨਾ ਇਹਨੂੰ ਪਾਣੀ ਦੇਣਾ ਉਹਨਾਂ ਵਾਸਤੇ ਚਾਹੀਦਾ ਉੱਚੇ ਬਾੜ ਦੇ ਦਰਸ ਪਹਿਲਾਂ ਕਿਤੇ ਨੇ ਉਰੇ ਦੇ ਘਰ ਆ ਕੇ ਤੂੰ ਉਗਾਈ ਇਹ ਤੋ ਜਾਣਦੇ ਕਿ ਉਹ ਚਾੜਿਆ ਕਿਉਂ ਨਹੀਂ ਵਾ ਕੀਤਾ ਤੈਨੂੰ ਕੀ ਲੋੜ ਐ ਜਲਦੀ ਉੱਚੇ ਦੀ ਵੇ ਨਹੀਂ ਤੂੰ ਆਪਣਾ ਜਿਵੇਂ ਚੱਲ ਜਿਵੇਂ ਚਲਾਉਂਦਾ ਤੇ ਮੈਂ ਚੱਲੀ ਜਾ ਬਸ ਦੀ ਕਦੇ ਵੀ ਗੱਲ ਨਾ ਕਿ ਮੈਨੂੰ ਉੱਚਾ ਕਿਉਂ ਕੀਤਾ ਦੀਵਾ ਕਿਉਂ ਕੀਤਾ ਇਹ ਜਸਵਾ ਕਰ ਲੋ ਖਸਮੇ ਜਾਨ ਖਿਮਾ ਕਰ ਰਹਾ ਖਸਮੇ ਜੇ ਜਾਣ ਲੈ ਤਾਂ ਫਿਰ ਸਭ ਕੁਝ त्याग ਕੇ ਰਹਿ ਦੇ ਤਿਵਨ ਨੌਰੂ ਗਰੋ ਦਾ ਨੌਰੂ ਲੋ ਜਿਵੇਂ ਚਲਾਉਂਦਾ ਚਲੀ ਜਾਓ ਖਿਮਾ ਦਾ ਬੰਦਾ ਜਿਵੇਂ ਉਹ ਚਲਾਉਂਦਾ ਉਹ ਚਲੀ ਜਾਓ ਸਭ ਕੁਝ ਛੱਡਿਆ ਹੋਇਆ ਹੈ ਤੋ ਬਦਲ ਹੈ ਫਿਰ ਰਖਿਆ ਹੋਇਆ ਹੈ ਰਖਿਆ ਹੋ ਨੇ ਜੀ ਦੀ ਬੁੱਧੀ ਦੇ ਵਿੱਚ ਕੋਈ ਵਿਕਾਰ ਨਹੀਂ ਪੈਦਾ ਹੁੰਦਾ ਜਦੋਂ ਬੁੱਧੀ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ ਸਾਡੀ ਅਕਲ ਮਾਰੀ ਜਾਂਦੀ ਹੈ ਉਹਦੇ ਵਿੱਚ ਖਰਜ ਜਾਂਦੀ ਹੈ ਤਕੜ ਘਟ ਜਾਂਦੀ ਫਿਰ ਤੁਹਾਡੀ ਜੋ ਬੁੱਧੀ ਉਹ ਘਟੂ ਦੀ ਨੁਕਸਾਨ ਨਹੀਂ ਹੁੰਦਾ ਨਹੀਂ ਅਖਿਆ ਬਾਦਲੇ ਅਖਿਆ ਬਾਦਲੇ ਕਹਿੰਦੇ ਨੇ ਜੋ ਤੁਹਾਡਾ ਬੁੱਧੀ ਦਾ ਵੇਟ ਹੈ ਨ ਹੋ ਗਿਆ ਬੈਕਸੀਮਮ ਸਟੈਂਡਰਡ ਤੇ ਬੇਸਟਰ ਉਹ ਬੁੱਧੀ ਦਾ ਬੁੱਧੀ ਨੂੰ ਕੀ ਖਰਾਬ ਕਰਨ ਚਿੰਤਾ ਜਦੋਂ ਚਿੰਤਾ ਪੈਦਾ ਹੋਦੀ ਹੈ ਤਾਂ ਖਰਾਬ ਹੋ ਜਾਂਦੀ ਹੈ ਸਾਰੀ ਅਕਲ ਖਰਾਬ ਹੋ ਹਉਂਦੀ ਤੇ ਇਹੀ ਗੁਸਾਉਂਦਾ ਅਕਲ ਨੇ ਕਹਦਾ ਅਕਲ ਦੇ ਸਾਹਦਰੀ ਦਿੱਤਾ ਤਾਂ ਕੱਟੇ ਬੈਠਾ ਪਤਾ ਨਹੀਂ ਕੀ ਹੋ ਗਿਆ ਮੇਰੇ ਗਲਤੀ ਹੂੰ ਅਕਲ ਤੇ ਵੱਡਾ ਤੇ ਵੱਡਾ ਜਦੋਂ ਅਕਲ ਤੇ ਵੱਡਦਾ ਜਾਂਦਾ ਸਮਝੋ ਦੋ ਸੁੱਖ ਦੀ ਹੈ ਦੁੱਖ ਅਕਲ ਤੇ ਬੜਦਾ ਪੈਣ ਤੇ ਤਾਂ ਬਚਾਂਗੇ ਜਿਵੇਂ ਉਹ ਚਲੋਦੇ ਹੋਵੇਂ ਚੱਲਾਂਗੇ ਜਦ ਅਸੀਂ ਆਪਣੀ ਮਰਜ਼ੀ ਨਾਲ ਚੱਲਦੇ ਉਹ ਹੀ ਪੈ ਜਾਂਦਾ ਪੈ ਜਾਂਦਾ ਜੋ ਕਰਦਾ ਠੀਕ ਹੈ ਇੱਜਤ ਕੀ ਹੁੰਦੀ ਹੈ ਵਿੱਚ ਕੀ ਹੁੰਦੀ ਹੈ ਕੋਈ ਰੌਲਾ ਨਹੀਂ ਇਹ ਇਹ ਰੌਲਾ ਹੈ ਤੁਸੀਂ ਬੇਇੱਤਿਹਾ ਕੋਈ ਕੰਮ ਕਰਦਾ ਰਹੋ ਰੂਣੀ ਮਤਾਂ ਵੀ ਆ ਕੰਮ ਪਾਣਾ ਚਾਹਤਾ ਜਿਹਨੂੰ ਗਿਆਨ ਹੋਵੇ ਤਾਂ ਸਾਹਮਣੇ ਚੱਲੋ ਅਸਲ ਤੋਂ ਕਮਲੇ ਤੇ ਚੱਲੋ